ਗੁਰਦੀ ਮਾਤੂ ਲੈ ਆਣੇ ਭਗਤੀ ਨਾਮੋਂ ਡੁੱਬੇ ਸਾਰੇ ਗੁਰ ਕੀ ਮਾਤੂ ਲੈ ਹੋਏ ਆਣੇ ਕਹਾਂ ਆ ਗੁਰ ਕੀ ਮਾਤਾ ਲੈ ਜੋ ਤਨ ਨੇ ਗੱਲਾਂ ਨਾ ਨਾਮ ਨਾਨਕ ਪਸਾਦਾਂ ਫਿਰ ਚੱਕਲੀ ਨਾਮ ਪਸਾਰ ਕੇ ਪਸਾਇਆ ਆ ਮਤ ਲੈ ਲੈ ਲੈਣੀ ਹੈ ਗੁਰ ਕੀ ਮਾਤੋਂ ਲੈ ਡੁੱਬੇ ਸਾਰੇ ਉਸ ਤੋਂ ਬਿਨਾ ਨਾਮੋਂ ਹੈ ਹੋਰ ਕੀ ਮੱਤ ਲੈਣੀਓ ਆ بڑے بڑے ਸਿਆਣੇ ਡੁੱਬ ਗਏ ਜਿਹਨੇ ਗੁਰ ਕੀ ਮੱਤ ਨਹੀਂ ਲਈ ਆ ਹੋਰ ਮੱਤਾਂ ਹੋਰ ਹੋਰ ਕੋਈ ਸ਼ਬਦ ਨੇ ਡੱਬਰ ਡੁੱਬ ਗਏ ਸਾਰੇ ਇੱਕ ਭਗਤੀ ਹੋਈ ਸਿੱਖੀ ਬਾਤ ਦੇ ਜ਼ਰੀਏ ਕੱਲੀ ਆ ਸਾਰੀ ਸਿੱਖੀ ਦਾ ਹੀ ਇੱਥੇ ਖੜੀ ਹੈ ਗੁਰ ਮੱਤ ਦੇ ਆ ਕੋਈ ਲੈ ਰਿਹਾ ਗੁਰ ਕੀ ਮੱਤ ਚੋੜੀ ਲੈ ਰਿਹਾ ਇੱਕ ਭਗਤੀ ਦਾ ਸਾਰੀ ਗੱਲ ਕਰਕੇ ਜੋਰ ਗੁਰ ਕੀ ਮਤੋ ਲੈ ਹੋਇ ਆਣੇ ਇਹ ਹੀ ਭਗਤੀ बडे ਸਿਖਾਦੀ ਬੜੇ ਬੜੇ ਸਿਆਣੇ ਡੁੱਬ ਗਏ ਇਸ ਭਗਤੀ ਤੋਂ ਬਿਨਾ ਉਹ ਜਿਹੜੇ ਡੁੱਬਣ ਵਾਲੇ ਸੀ ਉਹ ਸ੍ਰੀ ਚੰਦ ਵੀ ਸੀ ਉਹਨਾਂ ਦੇ ਵਿੱਚ ਹੀ ਰੁਪਿਆ ਹੋਇਆ ਸਿਆਣਾ ਸੀ ਉਹ ਜਿਆਦਾ ਗੁਰਤੀ ਮਤ ਨਹੀਂ ਲਈ ਵੱਟ ਹੋਣ ਲੈ ਲਈ ਨੌ ਪ੍ਰਕਾਰ ਦੀਆਂ ਭਗਤੀਆਂ ਉਹ ਤਾਂ ਸਿਆਣਾ ਸੀ ਨਾ ਉਬਰ ਜੀ ਵੀ ਬੜਾ ਸੀ ਸਿਆਣਾ ਸੀ ਚਾਰੇ ਪਾਸੇ ਤੇ ਸਿਆਣਾ ਸੀ ਡੁੱਬ ਗਿਆ ਉਹ ਹੋਰ ਵੀ ਜਿਹੜਾ ਸਿਆਣਾ ਸੀ ਗੁਰੂ ਘਰ ਚ ਪੈਦਾ ਹੋਇਆ ਸਾਰੇ ਡੁੱਬ ਗਏ ਆਏ ਇਹਦੇ ਆਪਣੇ ਬੜੇ ਭਾਈ ਵੀ ਡੁੱਬੇ ਹੋਏ ਨੇ ਉਹ ਵੀ ਸਿਆਣੇ ਨੇ ਉਹ ਦੂਜਿਆਂ ਨੂੰ ਤਾਂ ਗੁਰ ਕੀ ਮਤ ਮਿਲ ਇਹਨਾਂ ਨੇ ਕਹਤਾ ਗੁਰ ਕੀ ਸੀ ਇਹਨਾਂ ਨੂੰ ਇਹ ਚੱਲੂ ਕੀ ਗੱਲ ਐ ਤੇ ਹੋਰ ਕੀ ਚੱਲੂ जिते गुरकी माते सी ओना ने नहीं लई ओना नु सपो दे बप्ती जिते जीओ दी ओना ਸੀ के मैं कहि जाऊं ए गल गुरकी मातु ए आणे तो गुरकी माते रहला जिन्ना ने नहीं लई जिन्ना नु उस वेले मिलती सी करच सी संग दी बैठे नहीं जुड़े हुए ਸੀ ਦੇਖਣ ਬੜੇ ਸਿਆਣੇ ਬਣ ਕੇ ਉਹਨਾਂ ਨੇ ਪੰਡਤਾਂ ਨੂੰ ਦੂਜਾ ਨਾਲ ਕੇ ਗੁਰਤੀ ਵਿੱਚ ਜੀ ਲੇ ਉਹ ਡੁੱਬ ਗਏ 10 ਫਨਾਵੋ ਡੁੱਬੇ ਸਿਆਣੇ ਨੂੰ ਧਰਤੀਆਂ ਨੂੰ ਮਹਾਦੇਵ ਨੂੰ ਨਹੀਂ ਮਿਲੀ ਗੁਰਿਆਈ ਉਹ ਡੁੱਬਿਆ ਹਾਂ ਕਰਕੇ ਨਹੀਂ ਮਿਲੀ ਵੀ ਡੁੱਬੇ 2-3 ਧਣਗੇ ਇਹ ਡੁੱਬੇ ਨੇ ਡਬੋ ਦੇਣ ਤੇ ਸਾਡੀ ਸਤਿਕਰੂ ਤਾਂ ਨਹੀਂ ਦਿੱਤੀਆਂ ਨੂੰ ਸ੍ਰੀ ਜੀ ਨੂੰ ਤਾਂ ਨਹੀਂ ਹੋ ਰਹੀ ਦਿੱਤੀ ਡੁੱਬਿਆ ਹੋਇਆ ਡਬੋ ਦੂਗਾ ਤਾ ਤੁਸਾ डबो दूगा, ਨਹੀਂ ਦਿੱਤੀ ਹੋ ਰਹੀ ਡੁੱਬਿਆ ਹੋਇਆ ਡਬੋ ਦੂਗਾ ਕੋਰ ਅਫਰਦਾਸ ਨੇ ਆਪਣੇ ਮੁੰਡਿਆਂ ਨੂੰ ਹੋ ਰਹੀ ਦਿੱਤੀ ਡੁੱਬੇ ਹੋਣਾ ਡਬੋ ਦੇਣਗੇ ਆਹ ਗੱਲ ਕਹੀਆ ਸਿੱਧਿਓ ਨਹੀਂ ਇਹਦੇ ਹੱਥ ਕਰਕੇ ਦਿਖਾਉਂਦੀ ਗੁਰੂ ਘਰ ਦੇ ਵਿੱਚ ਜੋ ਵੀ ਦੂਜੇ ਪਾਸੇ ਜਿਹੜੇ ਵੱਡਤ ਹੈ ਉਹਦੇ ਵਿੱਚ ਉਹਦਾ ਆਪਣਾ ਉਹਨਾਂ ਦਾ ਕਿਹਾ ਕਿ ਜਿਹੜੇ ਅਵਰ ਉਪਾਵ ਬਾਕੀ ਨੂੰ ਦਾ ਅਵਰ ਉਪਾਵ ਕਿਹਾ ਹੋਇਆ ਉਹਨਾਂ ਦੇ ਆਬਾਵੇਂ ਹੋ ਨਾ ਤੇ ਮੱਤਾਂ ਹੀ ਹੋ ਗਈ ਅਵਰ ਉਪਾਵ ਸਾਹਿਬ ਦੀਤ ਉਹਨਾਂ ਨੂੰ ਇਹ ਗੱਲ ਕਿਸੀ ਆ ਘਰ ਦੇ ਨੂੰ ਕਿਸੀ ਹੋਈ ਗੱਲ ਸਿੱਧੀ ਹੋਈ ਅੱਜ ਕੀ ਹੋ ਰਿਹਾ ਇਹਦਾ ਮਤਲਬ ਸਾਰੀ ਵੀਡੀਓ ਦੇ ਅੱਜ ਸਾਰੇ ਵੀਰੋ ਉਹ ਇਹ ਸਿੱਖਾਂ ਦਾ ਮੁੱਲ ਪਾਏ ਸੀ ਉਹਨਾਂ ਨੇ ਪਾਏ ਲੈ ਗੁਰੂ ਜੀ ਲੈਣੇ ਆਲੇ ਸੀ ਇਹਨਾਂ ਨੇ ਮੁੱਲ ਪਾਏ ਸੀ ਵੀਰਿਆ ਨੇ ਵੀਰਿਆ ਚੁਗਲਿਆ ਕਰ ਕਰਕੇ ਜੱਟੇ ਐਸਾ ਕੰਮ ਕੀਤਾ ਐ ਸਿੱਖੀ ਉੱਤੇ ਆਉਣੇ ਓਏ ਤੁਸੀਂ ਸਿੱਖੀ ਦਾ ਘਾਣ ਕਰਨ ਵਾਲੇ ਤਾਂ ਤੁਸੀਂ ਹੀਓ ਖੜਮ ਕਰਨ ਵਾਲੇ ਤੁਸੀਂ ਪੰਡਤਾਂ ਦੀ ਗੱਲਾਂ ਕਰਦੇ ਪੰਡਤ ਨੂੰ ਦੋਸਤ ਨੇ ਖੜੇ ਤੁਸੀਂ ਉਹ ਖਿਲਾਫ ਥੋੜਾ 6-700 ਕਰੋੜ ਰੁਪਏ ਦਾ ਬਜਟ ਹੈ ਸਾਰੇ ਸਿੱਖੀ ਦੇ ਘਾਣ ਗਲਤ ਹੀ ਲੱਗਿਆ ਔਰ ਕਾ ਤਰ੍ਹਾਂ ਲੱਗਿਆ ਲੱਗਿਆ ਤੇ ਬਜਟ ਕਾਹਦੇ ਲੱਗਿਆ ਸਿੱਖੀ ਦਾ ਨੁਕਸਾਨ ਕਰਦੇ ਸਿੱਖੀ ਦੇ ਦੇ ਪਾਸੇ ਪਰਫਾਰਮੈਂਸ ਨਾ ਹੋਵੇ ਤੇ ਤੇ ਉਹ ਕੀਤਾ ਬਦਲ ਉਹ ਮੇਰੇ ਸਿੱਖੀ ਦਾ ਲਗਾਤਾਰ ਬਹੁਤ ਪਰ ਉਹ ਨਹੀਂ ਕੋਈ ਇਸ ਗੱਲ ਤੁਸੀਂ ਉਹ ਤਾਂ ਦੇਖੋ ਜਿਹੜਾ ਹੀ ਉਹ ਚੁੱਪ ਨਾ ਕਰੇ ਉਹ ਗੱਲ ਲੱਗਾ ਹੈ ਤੁਸੀਂ ਤਾਂ ਨਹੀਂ ਜਾਂਦੇ ਵੀ ਗੱਲ ਹੋਵੇ ਬੀਰਾ ਤੁਹਾਨੂੰ ਸਿੱਕੇ ਜਾਂਦਾ ਹੋਵੇ ਜਿਹੜਾ ਥੋੜੀ ਮੰਨੇ ਆ ਉਹ ਵਾਲਾ ਇਲਾਕਾ ਗੁਰਵਾਲਾ ਹੋਵੇ ਪਰ ਤੁਸੀਂ ਤਾਂ ਚਾਹੁੰਦੇ ਨਹੀਂ ਹਰ ਕੀ ਭਗਤੀ ਕਰੋ ਮਨमीत ਨਿਰਮਲ ਹੋਏ ਜੀ ਹਰ ਕੀ ਭਗਤ ਕਰੋ ਮਨमीत ਮਨ ਕਰਕੇ ਮੀਤ ਮਨ ਕਰਕੇ ਮੀਤ ਹੋ ਤੂੰ ਜਿਹੜਾ ਹਰ ਕੀ ਭਗਤ ਕਰਦਾ ਉਹ ਮਨ ਕਾ ਮੀਤ ਹੈ ਮੇਰੇ ਦਾ ਹਰ ਕੀ ਭਗਤ ਕਰਨ ਵਾਲਾ ਬੁੱਢਾ ਵੀ ਹੈ ਮਨ ਮੀਟ ਨਿਰਮਲ ਹੋਏ ਤੁਮਾਰੋ ਚੀਰਮਲ ਹੋ ਤੇ ਕੋ ਨਿਰਮਲ ਬਾਨ ਨਹੀਂ ਹੋਇ ਜਤਨੇ ਹੁੰਦੇ ਹਾਂ ਕਿਤੇ ਚ ਰੁਕਸਾ ਸਾਰਾ ਮਾਇਆ ਦੇ ਚ ਹੈ ਉਹ ਮਾਨਾ ਚਤ ਦੋ ਹੈ ਇੱਕ ਹੈ ਉਹ ਹੋਈ ਹੈ ਹਾਂਜੀ ਹਰ ਕੀ ਭਗਤ ਕਰੋ ਬਰ ਨਿਰਮਲ ਹੋਏ ਮਨ ਮੈਲਾ ਤਾਂ ਸਭ ਕੁਝ ਮੈਲਾ ਸਭ ਕੁਝ ਕੀ ਹੈ ਸਭ ਕੁਝ ਕੀ ਹੈ ਜਿੰਨਾ ਬੁੱਧ ਵੀ ਮਾੜੀ ਸੋਚ ਵੀ ਮਾੜੀ ਗਿਆਨ ਵੀ ਮਾੜਾ ਸਭ ਕੁਝ ਮਾੜਾ ਪਰ ਜੀ ਕਮਲ ਰੱਖੋ ਮਨ ਮਾਹੇ ਜਨਮ ਜਨਮ ਕੇ ਚਲੂਖ ਜਾਹੇ ਚਲ ਕਮਲ ਰੱਖੋ ਮਨ ਮਾਹੇ ਹੱਥੇ ਵਿੱਚ ਰੱਖੋ ਗੁਰਾਂ ਨੂੰ ਤਕਾ ਕੇ ਜਿਹੜੇ ਗੁਰ ਨੇ ਨਾ ਸਾਰੇ ਫਿਰਦੇ ਆਲੇ ਹੱਥੇ ਵਿੱਚ ਰੱਖੋ ਮਾਣਿਆਰ ਹਿਰਦੈ ਕੋ ਹੋਂ ਮਾਤੇ ਅਰ ਹਿਰਦਾ ਬੈ ਹਿਰਦੇ ਵਿੱਚ ਕਮਨ ਹੋ ਜਾ ਚਰਨ ਕਮਨ ਹੋ ਕੋਲ ਨੂੰ ਹਾਂ ਚਰਨ ਕਮਰੇ ਜਨਮ ਜਨਮ ਕੇ ਕਿਲਵਖ ਜਾਣ ਜਨਮ ਵਿਚਾਰ ਮੁਖੇ ਕਿਲਵੇ ਵਿਚਾਂ ਜਨਮ ਜਨਮ ਦੀ ਜੜਿਆ ਚਿੱਤ ਹੈ ਕਿਲਵੋ ਚਿੱਤ ਹੁੰਦੀ ਮਾਇਆ ਦੀ ਚਿੱਤ ਜਨਮ ਜਨਮ ਦੀ ਚੰਤਾ ਤੇ ਹੀ ਦੁਬਾਰੋ ਆਪ ਜਦੋਂ ਆਪਣਾ ਨਾਮ ਵਿੱਚ ਪਾਵੋ ਸਉਮਤ ਕਹਿਤ ਰਹਤ ਗਤ ਪਾਵੋ ਆਪ ਜਦੋਂ ਆਪਣਾ ਆਪ ਵੀ ਜੇਪੋ ਦੂਜਿਆਂ ਨੂੰ ਨਾਮ ਜੀ ਪਾਵੋ ਆਪ ਵੀ ਗੁਰਮਤ ਆਪ ਵੀ ਗੁਰਮਤ ਨੂੰ ਸਭ ਤੋਂ ਸਮਝਾਵੋ ਆਪ ਵੀ ਗੁਰ ਕੀ ਮਤ ਲਾਓ ਦੂਜਿਆਂ ਨੂੰ ਵੀ ਗੁਰਮਤ ਦਓ ਸਮਝਾਓ ਸਉਮਤ ਕਹਿਤ ਰਹਤ ਗਤੀ ਪਾਵੋ ਸੁਣ ਸੁਣੋ ਜਿਹੜਾ ਸੁਣ ਵਾਲਾ ਕੋਈ ਕੋਈ ਦਾਵਾ ਕੋਸ ਕਹਤ ਰਹਤ ਕਹਤ ਰਹਤ ਰਹਤ ਜੋ ਸੁਣ ਲਈ ਆਖੀਆ ਕਿਸੇ ਨੇ ਆਖੀਆ ਕਿਸੇ ਨੇ ਸੁਣੀ ਪਰ ਉਧਰ ਤੇ ਚੱਲ ਰਹੇ ਹੋ ਹਾਂ ਗਤੀ ਪਾਵੋ ਤਾਂ 부ద్ధి আগে আগে ਜਾਊਗੀ ਕੋਣ ਬੰਦੋ ਕਹੇ ਕਿ ਰਹੋਗੇ ਤਾਂ 부ద్ధి ਛਾਲਾ ਮਾਰਦੀ ਹੈ ਅੱਗੇ ਚਲੀ ਜਾਊਗੀ ਤੇਰਾ ਅੱਗੇ ਅੱਗੇ ਨੇਰਾ ਕਿਤੇ ਦਾ ਦੇਣੀ ਹੁੰਦੀ ਨੇ ਰੇਡੀ ਜਿੰਨੀ ਸਪੀਡ ਹੋ ਜੂ ਜਿੰਨੀ ਸਪੀਡ ਹੁੰਦੀ ਆ ਲਾਈਟ ਦੀ ਉਹਦੇ ਹਿਸਬੇ ਨੇ ਰੇਡੀ ਹੁੰਦੀ ਓਕੇ ਓਕੇ ਬਾਸ ਨੇਰਾ ਖੜਦਾ ਨਹੀਂ ਲੜਦਾ ਨਹੀਂ ਕੀ ਐ ਝੂਠ ਲਾਈਟ ਕੀ ਐ ਸੱਚ ਉਹ ਨੇਰੇ ਦੇ ਪੈਰ ਹੁੰਦੇ ਨੇ ਮੇਰਾ ਘਟਿਆ ਹੁੰਦਾ ਕਦੇ ਜਾ ਕੇ ਚੱਲਣ ਦੇ ਨੇਰੇ ਦੀਆਂ ਜੜਾਂ ਨਹੀਂ ਪੱਟੀਆਂ ਉਕੀ ਲਾਹੋੜੀ ਉਹਦੇ ਗੱਡਿਆ ਹੋਇਆ ਹੈ ਮੇਰੇ ਨੂੰ ਪੱਟ ਕੇ ਪਰੇ ਸਿੱਧਣਾ ਬਹੁਤ ਉਹ ਤਾਂ ਨਹਿਰਾ ਦਾ ਉਹੀਂ ਉੱਪਰ ਹੁੰਦਾ ਪਰਮ ਪਰੇ ਹੁੰਦਾ ਹੈ ਦੇ ਉੱਤੇ ਝੂਠ ਉੱਪਰ ਹੁੰਦਾ ਇਹਦੇ ਪੈਰ ਨਹੀਂ ਹੁੰਦੇ ਜਿਉਂਨੇ ਇਹਦਾ ਸਾਡੀ ਸਪੀਡ ਹੈ ਜਿਹਦੀ ਲਾਈਟ ਦੀ ਸਪੀਡ ਹੈ ਉਹਨੇ ਸਪੀਡ ਦੇ ਰਹੀਆ ਫੱਟ ਹੋ ਜਾਂਦੀ ਦੀ ਫੱਟ ਨਹੀਂ ਆਉਂਦਾ ਨਹਿਰਾ ਹੈ ਸਾਰ ਪੂਤ ਸਤ ਹਰ ਕੋ ਨੋ ਸਹਿਜ ਸੁਭਾਏ ਨਾਨਕ ਗੁਣ ਗਾਉ ਸਾਰ ਪੂਤ ਸਾਰ ਪੂਤ ਹੈ ਜੇ ਇਹ ਵਸਤ ਸਤ ਹਰ ਨੋ ਕੋ ਨਾਮ ਕੀ ਹੈ ਪੂਤਾ ਸਾਰ ਕੋ ਉਤਸਾਰ ਹਰ ਕੋ ਨਾਮ ਸਾਰ ਕੋ ਉਤਸਾਰ ਬੱਲੇ ਬਣਾਇਆ ਜਾ ਸਕਦਾ ਹੈ ਦਿੱਤਾ ਜਾ ਸਕਦਾ ਹੈ ਲਿਆ ਜਾ ਸਕਦਾ ਹੈ ਵਸਤੂ ਹੈ ਜੀ ਜੀ ਜੜ ਕਰ ਗਹੋ ਨਾਮ ਹਰ ਸਤਿ ਵਸਤੂ ਹੈ ਹਦਨ ਸੰਗ ਗੋ ਹਾਂ ਸਾਰ ਕੋ ਸਾਰ ਕੋ ਹੈ ਸਾਰ ਸਤ ਸਾਰ ਦਾ ਤੇ ਲੋਕ ਦਾ ਸਾਰਿਆਂ ਹੈ ਹਰ ਕੋ ਨਾਮ ਸਾਰ ਕੋ ਹਮੇਸ਼ਾ ਰਹਿਣ ਵਾਲਾ ਹਮੇਸ਼ਾ ਉਮੇਸ਼ਾ ਲਈ ਸਾਰ ਪੁੱਤ ਹੈ ਕੱਲ ਨੂੰ ਫੋਟਾ ਨਹੀਂ ਸਾਬਤ ਹੋ ਸਕਦਾ ਸਮੇਂ ਨਾਲ ਇਹ ਸਮੇਂ ਨਾਲ ਫੋਟਾ ਨਹੀਂ ਸਮੇਂ ਦਾ ਕੋਈ ਅਸਰ ਨਹੀਂ ਇਤਿਹਾਸ ਪੁੱਤ ਸਾਰੋ ਸੱਤ ਉਹ ਅਜੇ ਤੱਕ ਸਮਝਦਾ ਹਰ ਕੋ ਨਾਨਕ ਨੂੰ ਗਾਉ ਇਸ ਕਰਕੇ ਸਾਇ ਜਵਸਤਾ ਛੋਕੇ ਕਿਛਾ ਉਕਰ ਰੱਖ ਕੇ ਅੰਦਰ ਕੋਣ ਕੋ ਸੱਤ ਸਹਿਜ ਤੁਹਾਡੀ ਭੁੱਖਾ ਗੁਣ ਆਪੇ ਹੀ ਦੌੜਦਾ ਰਹਿਣ ਸਹਿ ਸਭਾਏ ਗੁੰਦੋ ਦੌੜੋ ਸਹਿ ਸਭਾਏ ਗੁੰਦੋ